ਸ੍ਰੀ ਲੋਕ ਮਹੱਲਾ ਪਹਿਲਾ ਰਾਤੀ ਕਾਲ ਕਟੈ ਦਿਨ ਕਾਲ ਛੀਜੈ ਕਾਇਆ ਹੋਏ ਪ੍ਰਾਨ ਹਾਂ ਰਾਤ ਨੂੰ ਰਾਦੇ ਸਮੇਂ ਚ ਔਰ ਦਿਨ ਦੇ ਸਮੇਂ ਚ ਇਹਦੀ ਅਕਲ ਘਟਦੀ ਚਲੀ ਜਾਂਦੀ ਐ ਆਹੀ ਦਾ ਬਾਲਾ ਤਾਂ ਸਭ ਦਾ ਹੀ ਘਟਣਾ ਇਹਦਾ ਕੋਈ ਰੋੜਾ ਹੀ ਨਹੀਂ ਵਰਤਾ ਸਾਰਿਆਂ ਦੀ ਉਹ ਘਟਣੀ ਚਾਹੇ ਗੁਰਮਖ ਹੋਵੇ ਚਾਹੇ ਮਨਮੁਖ ਹੋਵੇ ਗਿਆਨ ਕੇ ਤਾਂ ਜਾਏਗਾ ਪੜਨੇ ਮਾਰ ਲਾਇਆ ਤੇ ਤਨ ਜਾਏਗਾ ਹਾਂ ਜਾਏ ਉਹ ਜਿਹਦੀ ਬੁੱਧੀ ਵਿਗੜਦੀ ਚਲੀ ਜਾਂਦੀ ਹੈ ਉਲਟੇ ਪਾਸੇ ਲੱਗੇ ਹੋਏ ਦੀ ਉਹਦਾ ਕੀ ਹੋਵੇ ਜਿਹਦੀ ਅਕਲ ਵੀ ਮਾਰੀ ਜਾਂਦੀ ਹੈ ਉਲਟੇ ਪਾਸੇ ਲਾਏ ਹੋਏ ਨੇ ਜਿਹੜੇ ਲੱਗੇ ਹੋਏ ਨੇ ਹੈ ਦੀ ਗੱਲ ਨਾਲ ਹੈ ਬਰਾਬਰੇ ਫਿਰ ਕੀ ਹੁੰਦਾ ਹੈ ਕਾਇਆ ਕਾਇਆ ਲਫਜ਼ ਗਿਆ ਨਾ ਜੇ ਕਾਇਆ ਨਾਲੋਂ ਦਾ ਫਿਰ ਬਾਹਲਾ ਸਰੀਰ ਆ ਪਕੜ ਲਾ ਕਰ ਲੈਂਦੇ ਕਾਇਆ ਆ ਗਿਆ ਕਾਇਆ ਵਾਲੇ ਨੂੰ ਬਾਹਰ ਬਾਹਲੇ ਨੂੰ ਬੰਦੇ ਨੇ ਆਪਾਂ ਥੱਲੇ ਨੂੰ ਬੰਦੇ ਆ ਤਾਂ ਦੋ ਦੋਏ ਕਾਇਆ ਦੀ ਗੱਲ ਆ ਗਈ। ਬਸ ਉਹਨਾਂ ਦੀ ਬਾਹਰਲੀ ਕਾਇਆ ਛੇ ਜਾਂਦੀ ਹੈ, ਬਲਹੀਰ ਹੋ ਜਾਂਦੀ ਹੈ, ਬਲ ਪ੍ਰਾਲ ਤੇ ਅਸੀਂ ਕਹਿੰਦੇ ਹਾਂ ਅੰਦਰਲੀ ਉਹਨਾਂ ਦੀ ਅਕਲ ਵੀ ਮਾਰੀ ਜਾਂਦੀ ਹੈ, بے ਹੋ ਜਾਂਦੇ ਨੇ। ਬਿਲਕੁਲ ਇਹ ਮਤਲਬ ਹੈ। ਪ੍ਰਾਲੀ ਜੋ ਅਨ ਨਾ ਹੁੰਦਾ, ਪ੍ਰਾਲ ਹੁੰਦੇ ਪ੍ਰਾਲੀ ਜਿਹਦੇ ਚ ਜੱਮਣ ਨੂੰ ਕਹਾ ਕਹਾ ਪੈਦਾ ਹੋਣ ਕੁਛ ਨਾ ਹੋਵੇ ਤਾਂ ਉਤੇ ਅਕਲ ਕਿੱਥੇ ਪੈਦਾ ਹੋਣੀ ਹੈ ਅਕਲ ਤਾਂ ਮਾਰੀ ਗਈ ਉਹਨਾਂ ਦੇ ਅੰਦਰ ਪ੍ਰਾਲੀ ਰਹਿ ਜਾਂਦੀ ਅਕਲ ਵਾੜੀ ਜਾਂਦੀ ਜਿਵੇਂ ਗਾਣੇ ਛੱਡਦੀ ਹੈ ਪ੍ਰਾਲੀ ਹੋ ਕੇ ਪ੍ਰਾਲੀ ਤੋਂ ਕੁਛ ਨਹੀਂ ਜੱਮਣ ਨੂੰ ਹੁੰਦਾ ਐ ਪ੍ਰਾਲੀ ਵਰਗੀ ਅਕਲ ਹੋ ਜਾਂਦੀ ਹੈ ਦੀ ਅੰਦਰੋਂ ਤਰਕ ਨਹੀਂ ਪੈਦਾ ਹੁੰਦਾ ਉਹਨਾਂ ਦੇ ਤਰਕ ਤੇ ਆ ਮਾਚਾ ਪਰਬਲ ਆਚਾ ਇਹਦਾ ਕੀ ਭਾਵ ਹੈ ਜੀ ਰਾਤ ਹੀ ਰਾਤ ਦੇ ਸਮੇਂ ਕੀ ਰਾਤ ਦੇ ਸਮਾਂ ਅਗਿਆਨਤਾ ਦਾ ਮਤਲਬ ਨਹੀਂ ਅਜੇ ਦਿਨ ਰਾਤ ਦੇ ਨੇ ਦਿਨ ਆ ਗਿਆ ਨਾ ਕਿ ਜੀ ਕਾਲ ਘਟਾਇ ਦਿਨ ਕਾਲ ਕਿ ਰਾਤ ਵਿੱਚ ਉਮਰ ਘਟਰੀ ਹੈ ਜੀ ਆ ਦਿਨੋਂ ਰਾਤ ਦੇ ਸਮੇਂ ਉਹਨਾਂ ਨੂੰ ਘਟਾ ਹੀ ਪੈ ਰਿਹਾ ਅੱਛਾ ਕਾਲ ਘਟਾਇ ਕਾਲ ਦਾ ਭਾਵ ਸਮਾਂ ਹੈ ਜੀ ਸਮਾਂ ਉਹ ਰਾਤੀਂ ਕਾਰ ਆਦਿ ਸਮੇਂ ਵੀ ਉਹਨਾਂ ਦੇ ਅਗਲ ਮਾਰੀ ਹੋ ਰਹੀਂਦੀ ਹੈ ਜੇ ਰਾਤ ਨੂੰ ਜਾਗਦੇ ਨੇ ਜਿਗ ਰਾਤੇ ਜਿਵੇਂ ਕਰਦੇ ਨੇ ਹੁਣ ਕਰਦੇ ਨਹੀਂ ਆ ਇਹ ਓ ਉਹ ਚਾਹ ਰਾਤ ਦਾ ਸਮਾਂ ਚਾਹ ਦਿਨ ਦਾ ਸਮਾਂ ਉਹਨਾਂ ਦੀ ਜਿਹੜੀ ਬੁੱਧੀ ਹੈ ਨਾ ਬੁੱਧੀ ਹੀ ਨੇ ਹੁੰਦੇ ਕਿਲੇ ਜਾਂਦੇ ਨੇ ਉਹ 2 ਵਜੇ ਉੱਠਦੇ ਨੇ ਤੜਕੇ ਉਹ ਵੀ ਤਾਂ ਰਾਤ ਹੀ ਹੁੰਦੀ ਹੈ ਉਦੋਂ ਬੁੱਧੀ ਹੁੰਦੀ ਹੈ ਉਹਨਾਂ ਦੀ ਰਾਤ ਹੋਵੇ ਚਾਹੇ ਦਿਨ ਹੋਵੇ ਹਾਂਜੀ ਤੇ ਨਹਿਫਲ ਜੋ ਹੈ ਦਾ ਪ੍ਰਤੀਕ ਹੈ ਹਾਂਜੀ ਹਾਂਜੀ ਨਹਿਫਲ ਦਾ ਪ੍ਰਤੀਕ ਵਰਤਨ ਵਰਤਿਆ ਸਰਬ ਜੰਜਾਲ ਭੁੱਲਿਆ ਚੁੱਕ ਗਿਆ ਤਪ ਤਾਲ ਆ ਜਿਹੜਾ ਵਰਤਦੇ ਨੇ ਫਿਰ ਗਾਂ ਵਰਤਉਂਦੇ ਨਹੀਂ ਆ ਨੇ ਕਲਾ ਪ੍ਰਸ਼ਾਦ ਹੋ ਰਹੀ ਚੀਜ਼ਾਂ ਜਿਹੜੀਆਂ ਖਾਣ ਵਾਲੀਆਂ ਵਰਤਉਂਦੇ ਨੇ ਕਰਕੇ ਜ ਰਾਤ ਨੂੰ ਜਨਨਾ ਦਾ ਖੰਡ ਪਾਠ ਕਰਕੇ ਵੀ ਵਰਤਉਂਦੇ ਨੇ ਉਹ ਜੰਜਾਲ ਆ ਉਹਦਾ ਸਾਰਾ ਮਾਇਆ ਜੋ ਵਰਤਨ ਵਰਤੇ ਆ ਉਹਨਾਂ ਨੇ ਜਾਗਰ ਦੇ ਵਿੱਚ ਵਰਤੇ ਆ ਜੋ ਵੀ ਕੁਝ ਸਾਰੀ ਪਦਾਰਥਾਂ ਨਾਲ ਸੰਬੰਧਿਤ ਚੀਜ਼ਾਂ ਵਿੱਚ ਉਹ ਕਰਦੇ ਨੇ ਉਹ ਪਰਾਲੇ ਉਹ ਸਭ ਕੁਝ ਜਾਣ ਆ ਭੁੱਲਿਆ ਚੂਕ ਭੁੱਲਿਆ ਹੋਇਆ ਚੁੱਕਿਆ ਉਹ ਹੈ ਚੂਕ ਗਿਆ ਤਪ ਤਾਲ ਤਪ ਤਾਲ ਕੀ ਹੈ ਟਪਕੀ ਹੈ ਤਪਦਾ ਕਰਨਾ ਸੀ ਟਪਦੀ ਹੈ ਹੈ ਟਪਦੀ ਤਾਲ ਹੈ ਜੋ ਟਪ ਕੁਝ ਹੋਰ ਸੀ ਤਪਸੀ ਗੁਰਮਤਿ ਨੂੰ ਸਮਝ ਕੇ ਮਨ ਦੇ ਉੱਤੇ ਲਾਗੂ ਕਰਨਾ ਮੰਨੂ ਬਦਲਣਾ ਇਹ ਤਪਸੀ ਉਹ ਤਾਂ ਕੀਤਾ ਨਹੀਂ ਹੋਰ ਝੰਡਵੰਡ ਜਿਆ ਕਰਕੇ ਜੀ ਉਹ ਕਰ ਲਿਆ ਅਸੀਂ ਗਣ ਪਾਠ ਕਰ ਲਿਆ ਉਹ ਕਹਿੰਦੇ ਨੇ ਅਸੀਂ ਇਹਨੇ ਤੈਨੂੰ ਸਮਾਧੀ ਲਾਉਂਦੇ ਨੇ ਕੋਈ ਤੜਕੇ ਉੱਠਦਾ ਕੋਈ ਕੁਝ ਕਰਦਾ ਅਸਲੀ ਤਪ ਤੋਂ ਭੁੱਲੇ ਹੋਏ ਤਪ ਨਾਲ ਤਾਲ ਨਹੀਂ ਉਹਾਂ ਦੀ ਮਿਲਦੀ ਜੇ ਤਪ ਨਾਲ ਤਾਲ ਮਿਲਦੀ ਤੇ ਬੁੱਧੀ ਹੀਰ ਕਿਉਂ ਹੁੰਦੇ ਦਿਨ ਰਾਤ ਤਪ ਦੇ ਨੂ ਤੇ ਕੁਝ ਹੋਰੇ ਕਰ ਰਹੇ ਆ ਠੀਕ ਹੈ ਜੀ ਅੰਦਾ ਚੱਕ ਚੱਕ ਪਿਆ ਚੇਹਰ ਪਿੱਛੇ ਰੋਵੇਂ ਲਿਆਵੇਂ ਫੇਰ ਹਾਂ ਅੰਦਾ ਚੱਕ ਚੱਕ ਅੰਦਾ ਸੀ ਸਾਰਾ ਅਗਿਆਨੀ ਸੀ ਸਾਰੀ ਉਮਰ ਚੱਖ ਮਾਰਦਾ ਰਿਹਾ ਪਿਆ ਚੇਹਰ ਉਹ ਹੁੰਦਾ ਜਿਹੜਾ ਆਪਾਂ ਬਾੜ-ਬਟ ਦੇਣਾ ਉਹ ਵੀ ਚੇਹਰ ਜਿਹੜਾ ਕਹਿੰਦੇ ਨੇ ਉਹਨੂੰ ਉਚਾ ਨਾਲ ਖੂਰੋ ਨਾ ਬਣਾ ਲਈਏ ਚੁੜ ਕੇ ਤੇ ਉਹ ਚੇਹਰ ਕਹਿੰਦੇ ਨੇ ਸੱਚਾ ਸੱਚਾ ਹੂ ਪੁੱਟਿਆ ਹੋਇਆ ਛੱਡਾ ਚੱਕ ਚੱਕ ਪਿਆ ਚੇਹਰ ਕੱਚੇ ਦੇ ਚ ਲੱਗ ਗਿਆ ਖੂਛ ਦੇ ਚ ਲੱਗ ਗਿਆ ਕੱਚੇ ਖੂਛ ਦੇ ਲੱਗਿਆ ਕੱਚੇ ਖੱਡੇ ਦੇ ਲੱਪਿਆ ਆਪਾਂ ਕਹਿੰਦੇ ਖੱਡੇ ਦੇ ਲੱਪਿਆ ਡੂੰਘੇ ਚ ਐਸੇ ਖੱਡੇ ਦੇ ਲੱਪਿਆ ਬਾਹਰ ਨਿਕਲਦਾ ਉਪਦੇਸ਼ ਕਰੀ ਜੋ ਉਹ ਨੂੰ ਪਿੱਛੇ ਰੋਵਾਂ ਲਿਆਵਾਂ ਫੇਰ ਪਿੱਛੇ ਰੋਂਦੇ ਉਹ ਉਹਨੇ ਮੋਹ ਜਿਨ੍ਹਾਂ ਦਾ ਹੈ ਰੋਵਾਂ ਲਿਆਵਾਂ ਫੇਰ ਉਹ ਫੇਰ ਕਹਿੰਦੇ ਹੁਣ ਫੇਰ ਜਨਮ ਲਊਗਾ ਕ੍ਰਿਸ਼ਨ ਨੂੰ ਕਹੀ ਜਾਂਦੇ ਨੇ ਜਨਮ ਲਊਗਾ ਔਰ ਦੇਵਤਿਆਂ ਨੂੰ ਫਿਰ ਕਹੀ ਜਾਂਦੇ ਨੇ ਫਿਰ ਆਉਗਾ ਟਮਗਾ ਆਊਗਾ ਮੁਸਲਮਾਨ ਇਸਲਾਮ ਵਾਲੇ ਵੀ ਕਹਿੰਦੇ ਨੇ ਉਹ ਸਾਡੇ ਪੈਗੰਬਰ ਆਉਣਗੇ ਸਾਡੇ ਉੱਠਣਗੇ ਜਿਉਂ ਕਬਰਾਂ ਜੋ ਕਬਰਾਂ ਜੋ ਉੱਠਣ ਵਾਲਿਆਂ ਦੀ ਗੱਲ ਹੈ ਲਿਆ ਵੇ ਫੇਰ ਦਾ ਮਤਲਬ ਇਹ ਹੈ ਉਹ ਵਿਸ਼ਵਾਸ ਕਰਦੇ ਨੇ ਫਿਰ ਆਊਗਾ ਉਹ ਫੇਰ ਹਾਂਜੀ ਬਿਨ ਬੁੱਝੇ ਕਿਛ ਮਰ ਜਾਹੀਂ ਦੀ ਆਈ ਸਮਝਣ ਤਾਂ ਗੱਲੇ ਪਰੇ ਐ ਸਮਝੀਦਾ ਉਹਨਾਂ ਨੇ ਜੋ ਸਮਝਿਆ ਉਹ ਤਾਂ ਗਲਤ ਹੈ ਬਿਨ ਬੁੱਝੇ ਕਛ ਸੂਝੇ ਨਹੀਂ ਬੁੱਝੇ ਤੇ ਬਿਨਾ ਕੋਈ ਸੋਝੀ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਚਲਿਆ ਗਿਆ ਛੱਡ ਕੇ ਸਰੀਰ ਉਹ ਬੁੱਝਣ ਵਾਲੀ ਗੱਲ ਰਹਿ ਗਈ ਉੱਥੇ ਸਮਝਣ ਵਾਲੀ ਗੱਲ ਕੀ ਦੇਹੀ ਉਹਦੇ ਬਾਰੇ ਗਿਆਨ ਦੇਨਾਂ ਤੋਂ ਗੱਲ ਹੈ ਉਹ ਬੁੱਝੇ ਕਛ ਸੂਝੇ ਨਹੀਂ ਸੋਝੀ ਕਿਵੇਂ ਆ ਜਵੇ ਕਿਵੇਂ ਆ ਗੱਲ ਜਾਂ 부ਝੀ ਹੋਣੀ ਹੈ ਉਹ ਫੇਰ ਕਿਵੇਂ ਆ ਜੂਗਾ ਇਸੇ ਸਰੀਰ ਦੇ ਵਿੱਚ ਨਹੀਂ ਆਉਂਦਾ ਜੇ ਆਪ ਹੀ ਗਿਆ ਦੂਆ ਜਨਮ ਲਿਆ ਸਰੀਰ ਨਹੀਂ ਆ ਸਕਦਾ ਆ ਗੱਲ ਬੁੱਝਣ ਵਾਲੀ ਹੈ ਜੇ ਚਲੋ ਆਤਮਾ ਨੂੰ ਮੰਨਦੇ ਵੀ ਆਂ ਕਿ ਵੀ ਦੂਜੀ ਵਾਰ ਆ ਜਾਂਦੀ ਵੀ ਜੁਨਾਂ ਦੇ ਵਿੱਚ ਫਿਰਦੀ ਐ ਇਹ ਗੁਰਬਾਣੀ ਨੇ ਮਨ ਵੀ ਲਿਆ ਵੀ ਫਿਰ ਫੜ ਜੁਨੀ ਪਾਏ ਤਾਂ ਉਹ ਹੀ ਸਰੀਰ ਮਿਲਣਾ ਸ਼ਕਲ ਨਹੀਂ ਉਹ ਮਿਲਣੀ ਹੈਗੀ ਗੁਰਦਨ ਵਾਲੀ ਗੱਲ ਇਹ ਹੈ ਉਹ ਫਿਰ ਉਸੇ ਉਸੇ ਸਰੀਰ ਚ ਕਿਵੇਂ ਆ ਸਾਡੇ ਵੀ ਕਹੇ ਜਾਂਦੇ ਦਸਮ ਬਾਸ਼ਾ ਨੂੰ ਆ ਫਿਰ ਆਊਗਾ ਫਿਰ ਜਨਮ ਲੈਣਾ ਇਹ ਲੈਣਾ ਇਹ ਸਾਰੇ ਹੀ ਹੁੰਦੇ ਨੇ ਕਿ ਉਹਨਾਂ ਨੇ ਗੱਲ ਪੁੱਜੀ ਨਹੀਂ ਬਿਨ ਬੁੱਝੇ ਤੇ ਨੇ ਕੋਈ ਆਉਦਾ ਹੀ ਨਹੀਂ ਆਉਣਾ ਤਰੀਕੇ ਦੀਆਂ ਬਨੋਤਾ ਦੇ ਲੋਕਾਂ ਸੀ ਪਾਗੜਾ ਵਾਲੀਆਂ ਬਨੋਤਾ ਨੇ ਆਗਿਆਂ ਦੀਆਂ ਵਾਲੀਆਂ ਅੰਨੇ ਵਾਲੀਆਂ ਬਨੋਤਾ ਨੇ ਹਾਂਜੀ ਨਾਨਕ ਖਸਮੈ ਕੀ ਵੇ ਭਾਵੈ ਸੋਈ ਮੂਹੇ ਜਿਨ ਚਿੱਤ ਨਾ ਆਵੇ ਪਰਮਾਨ ਖਸਮ ਦਾ ਕੀ ਹੈ ਉਹਨੂੰ ਕੀ ਭੌਂਦਾ ਉਹਦਾ ਪਹਾਣਾ ਕੀ ਹੈ ਕੋਈ ਬੂਅ ਜਿਨ ਜਿੱਤਨ ਆਦਮਰਦੇ ਉਹਨੇ ਪਾਈ ਜਿਨ੍ਹਾਂ ਦੇ ਚਿੱਤ ਜੇਤਨ ਨਹੀਂ ਹੋਇਆ ਜਿਹੜਾ ਜਿਹਦੇ ਚਿੱਤ ਚ ਸੱਚਾਈ ਪ੍ਰਗਟ ਨਹੀਂ ਹੋਈ ਜਿਨ੍ਹਾਂ ਨੇ ਸੱਚ ਜਾਣਿਆ ਨਹੀਂ ਚਿੱਤ ਜਿਨ੍ਹਾਂ ਦੇ ਸੱਚ ਨੀ ਆਇਆ ਸੱਚ ਨੂੰ ਜਿਨ੍ਹਾਂ ਨੇ ਜਾਣਿਆ ਨੀ ਉਹ ਬੂਅ ਸਾਰੇ ਹੀ ਮਰ ਗਏ ਚਾਹੇ ਉਹ ਕਿੱਡੇ-ਕੱਡੇ ਵੱਡੇ ਸੰਤ ਤੇ ਕਿੰਨੀ ਦੁਨੀਆ ਉਹਨਾਂ ਦੇ ਮਗਰ ਸੀ ਇਹਦੇ ਨਾਲ ਕੋਈ ਫਰਕ ਨਹੀਂ ਪਿਆ ਉਹ ਮਰਦੇ ਨੇ जिना ਗਾਵੇ ਕਿੱਥੇ ਨਹੀਂ ਹੁੰਦਾ ਹਾਂਜੀ ਮੂਹਾਂ ਪਿਆਰ ਪ੍ਰੀਤ ਮੂਈ ਮੂਹਾਂ ਵੈਰਤ ਵਾਦੀ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਕੌਣ ਕੌਣ ਮਰੇ ਮਰਿਆ ਹਾਂ ਦੀ ਲਿਸ਼ਟਾ ਛਾਂੜਾ ਤੁਸੀਂ ਆ ਉਹ ਮਰ ਗਿਆ ਜਾਂ ਨਹੀਂ ਮਰਿਆ ਮੂਹਾਂ ਪਿਆਰ ਪ੍ਰੀਤ ਮੂਈ ਇਹਦੇ ਅੰਦਰ ਇਸਲਾਮ ਨੂੰ ਚੰਗਾ ਸਮਝਦੇ ਸੀ ਉਸ ਵੇਲੇ ਦੂਜਿਆਂ ਨੂੰ ਨਹੀਂ ਚੰਗਾ ਸਮਝਦੇ ਮਹੱਲੇ ਪਹਿਲੇ ਦੀ ਗੱਲ ਹੈ ਜਲਦੀ ਉਧਰ ਸਿੱਖ ਕੋਈ ਨਹੀਂ ਹੈ ਦੇਖੋ ਉਧਰ ਕਿੱਥੇ ਕੋਈ ਪਿਆਰ ਹੀ ਦੇ ਅੰਦਰ ਸਭ ਵਾਸਤੇ ਪਿਆਰ ਕੋਈ ਨਹੀਂ ਹੈ ਪ੍ਰੀਤ ਨਹੀਂ ਹੈ ਜਿਨ੍ਹਾਂ ਦੇ ਅੰਦਰ ਆਪਣੇ ਅੰਤਰਾਤਮਾ ਨਾਲ ਵੈਰ ਵਾਦੀ ਵੈਰ ਰੱਖਣ ਵਾਲੇ ਜਿਹੜੇ ਵਾਦੀ ਨੇ ਇਹ ਵਾਦੀ ਕੌਣ ਸੀ ਵਾਦੀ ਸੀ ਪੰਡਤ ਵੈਰ ਕਰਨ ਵਾਲੇ ਸੀ ਮੁਸਲਮਾਨ ਵੈਰਵਾਦੀ ਉਹ ਕਹਿੰਦੇ ਅਸੀਂ ਸਾਰੀ ਦੁਨੀਆ ਦੇ ਧਰਮਾਂ ਨੂੰ ਇਸਲਾਮ ਦੇ ਵਿੱਚ ਬਦਲ ਦੇਣਾ ਇਹਨਾਂ ਦੇ ਅੰਦਰ ਵੈਰ ਭਾਵਨਾ ਸੀ ਬਾਦੀ ਬਾਦਬਾਦ ਕਰਦੇ ਸੀ ਪੰਡਤ ਮੁ슬ਮਾਨਾਂ ਨਾਲ ਜਬਾਦਬਾਦ ਦਾ ਮਸਲਾ ਨਹੀਂ ਸੀ ਹੁਣ ਵੀ ਨਹੀਂ ਹੈ ਉਹਨਾਂ ਦੇ ਵਿੱਚ ਬਾਦਬਾਦ ਦਾ ਮਸਲਾ ਇਹ ਪੰਡਤਾਂ ਦੇ ਵਿੱਚ ਹੈ ਵੈਰਵਾਦੀ ਇਹ ਦੋਹੇ ਤਰ੍ਹਾਂ ਦੇ ਮਰਦ ਜਿਹੜੇ ਦੋਹੇ ਤਰ੍ਹਾਂ ਦੇ ਆਗੂ ਲੜੇ ਮਰਨ ਵਾਲੇ ਨੇ ਹਾਂਜੀ ਠੀਕ ਹੈ ਜੀ ਵਨ ਗਿਆ ਰੂਪ ਦੁਖੀ ਦੇਹ ਰੁਲੀ ਵਨ ਗਿਆ ਜਿਹੜਾ ਵਨ ਸੀਗਾ ਰੂਪ ਸੀਗਾ ਬਣ ਹੁੰਦਾ ਸਰੀਰ ਕਰਕੇ ਰੂਪੀ ਸਰੀਰ ਕਰ ਗਈ ਹੈ ਬਣ ਗਿਆ ਰੂਪ ਬਣ ਗਿਆ ਜਦੋਂ ਜਵਾਨੀ ਚਲੀ ਗਈ ਰੂਪ ਬਣ ਗਿਆ ਦੁਖੀ ਸੀ ਰੋਣ ਦੀ ਚ ਰੋਲਣਾ ਹੀ ਹੁੰਦਾ ਫਿਰ ਜਵਾਨੀ ਚ ਬਾਤ ਕਰਦਾ ਰਹਾ ਬਾਤ ਕਰਦਾ ਰਹਾ ਉਪਰਾਪੇ ਚ ਕਿਸੇ ਨੇ ਪੁੱਛਿਆ ਨਹੀਂ ਬੇਵਰ ਰੋਲਦਾ ਫਿਰਦਾ ਰਹਾ ਹਾਂਜੀ ਕਿੱਥੋਂ ਆਇਆ ਕਹਿ ਗਿਆ ਕਿ ਹੋ ਸ਼ੀ ਓ ਹੋ ਸੀ ਮਨ ਮੁਖ ਗੱਲਾਂ ਗੋਈਆਂ ਕੀਤਾ ਚਾਉ ਰਲੀ ਜੇ ਉਹ ਜਿਹੜਾ ਦੁਖੀ ਤੁਸੀਂ ਲੱਗ ਪੜਿਆ ਨਾ ਜੇ ਇਹਨੂੰ ਦੁਖੀ ਪੜ ਲਈਏ ਨਾ ਬਹੁਤ ਬਚਨ ਬਣਸੂਗਾ ਫੇਰ ਠੀਕ ਰਹੂਗਾ ਅੱਛਾ ਜੀ ਹਾਂ ਜੀ ਕਿੱਥੋਂ ਕਹਿ ਗਿਆ ਕਿੱਥੋਂ ਆਇਆ ਸੀ ਕਿੱਥੇ ਚਲਾ ਗਿਆ ਕਿ ਉਹ ਨਸੀਓ ਕਿ ਉਹ ਸੀ ਆਤਮਾ ਦੀ ਗੱਲ ਹੈ ਕਿੱਥੋਂ ਆਇਆ ਸੀ ਆਈ ਸੀ ਆਤਮਾ ਜਿੱਥੇ ਚਲੀ ਗਈ ਆਤਮਾ ਕਿਉਂ ਜੀ ਕੀ ਉਹ ਆਤਮਾ ਦਾ ਰੂਪ ਰੇਖ ਇਹ ਕੋਈ ਕਿਸੇ ਨੂੰ ਪਤਾ ਨਹੀਂ ਇਹਦੇ ਨਾਲ ਨਹੀਂ ਸਾਹੀ ਉਹ ਦੇਹ ਨੂੰ ਸਰੀਰ ਨੂੰ ਫੋਟੋ ਨੂੰ ਰੱਖ ਕੇ ਕਰੀ ਜਾਂਦੇ ਨੇ ਫੇਰ ਆਊਗਾ ਕ੍ਰਿਸ਼ਨ ਫੇਰ ਆਊਗਾ ਆਰੰਭਜਰ ਦੇ ਫੇਰ ਆਊਗਾ ਫਲਾਨਾ ਇਹ ਫੇਰ ਆਊਗਾ ਦਸ਼ਮਪਾਸ਼ਾ ਤਾਂ ਕਹੀ ਜਾਂਦੇ ਨੇ ਆਤਮਾ ਦੀ ਗਿਆਨ ਨਹੀਂ ਆਤਮਾ ਨਾਲ ਜੁੜਈ ਨਹੀਂ ਹੋਏ ਆਤਮਾ ਤਾਂ ਆਪਣੇ ਨਾਲ ਨਹੀਂ ਜੁੜੇ ਹੋਏ ਜਿਹੜੇ ਆਪਣੀ ਆਤਮਾ ਨਾਲ ਜੁੜ ਜਾਂਦੇ ਨੇ ਉਹ ਇਹ ਮਨੋਤ ਨਹੀਂ ਕਰਦੇ ਇਹ ਮਨੋਤ ਨਹੀਂ ਉਹਨਾਂ ਦੇ ਅੰਦਰ ਇਹਦਾ ਕੋਈ ਮਤਲਬ ਨਹੀਂ ਹੁੰਦਾ ਸ਼ਰੀਰਾਂ ਦਾ ਉਹਦੇ ਮਤਲਬ ਸ਼ਰੀਰ ਨਾਲ ਨਹੀਂ ਜੁੜਦੇ ਕਿਸੇ ਦੇ ਨਾਲ ਵੀ ਉਹ ਸ਼ਰੀਰ ਨਾਲ ਜੁੜਨਾ ਮਾਇਆ ਨਾਲ ਜੁੜਨਾ ਬਰਾਬਰ ਹੈ ਕਿਹੋ ਨਾ ਸੀ ਉਹਦਾ ਮਤਲਬ ਕਿਹੋ ਜਿਹਾ ਨਹੀਂ ਸੀਗਾ ਸ਼ਰੀਰ ਉਹ ਨਹੀਂ ਸੀਗਾ ਕਹਿਣ ਦਾ ਮਤਲਬ ਕਿ ਸ਼ਰੀਰ ਤਾਂ ਨਹੀਂ ਸੀਗਾ ਸ਼ਰੀਰ ਉਹਨੂੰ ਭੁੱਲ ਲਿਆ ਸੀ ਕਿ ਸੀ ਕਿਹਾ ਜਾਂ ਸੀਗਾ ਇਹ ਪਤਾ ਹੀ ਨਹੀਂ ਆਤਮਾ ਕੀ ਸੀ ਇਹ ਪਤਾ ਨਹੀਂ ਜਿਹੜਾ ਨਹੀਂ ਸੀ ਉਹ ਸ਼ਰੀਰ ਉਹਨੂੰ ਸ਼ਰੀਰ ਬੋਲਦੇ ਨੇ ਮਨ ਮੁਖ ਗੱਲਾਂ ਗੋਈਆਂ ਕੀਤਾ ਚਾਉਰਲੀ ਵਨ ਮੁਖ ਨੇ ਗੱਲਾਂ ਬੁਦਲੀਆਂ ਉਹ ਗੱਲਾਂ ਦੇ ਲਫਾਫੇ ਬਣਾ ਲੇ ਗੱਲਾਂ ਦੀਆਂ ਕਹਾਣੀਆਂ ਬਣਾ ਲੀਆਂ ਪਹਿਲਾਂ ਗੋਈਆਂ ਕਥਾਵਾਂ ਗੱਲਾਂ ਹੀ ਗੋਈਆਂ ਹੋਈਆਂ ਨੇ ਇਹਨਾਂ ਦੀਆਂ ਸਾਖੀਆਂ ਸੁਣਾਉਂਦੇ ਨੇ ਕੀਤਾ ਚਾਉਰਲੀ ਅਰ ਨਾਲ ਕੇ ਆ ਕਰਦੇ ਨੇ ਪਹਿਲਾਂ ਸਾਖੀਆਂ ਬਣਾ ਬਣਾ ਕੇ ਫਿਰ ਲੈ ਆਂਦੀਆਂ ਤਾਂ ਇਹਦੀਆਂ ਛਾਤੀਆਂ ਤੁਸੀਂ ਸੁਣਾਈ ਜਾਂਦੇ ਹੋ ਅੱਜ ਮੈਂ ਇਹਨਾਂ ਨੂੰ ਇੱਕ ਵਾਰ ਕਿਹਾ ਢਾਡੀ ਬੜੇ ਚੌੜੇ ਹੋ ਗੱਲਾਂ ਕਰਦੇ ਕਰਦੇ ਹਾਂ ਛਾਤੀਆਂ ਢੋਕ ਕੇ ਤੁਸੀਂ ਅੱਜ ਕਿਉਂ ਭੱਜ ਬਣੀ ਹੋਣਾ ਦੁਸ਼ਮਣ ਆਪੋ ਵੇ ਅਜਾੜੀਏ ਸਿੱਧ ਕੇ ਭੱਜੋਗੇ ਇੱਥੋਂ ਤੁਸੀਂ ਕਹਦੇ ਜੋਖੇ ਆਪਣੀ ਗੱਲ ਕਰਿਆ ਸਰ ਅੱਗੇ ਹੱਥ ਬੰਨਣ ਲੱਗੇ ਅਸੀਂ ਅੱਜ ਕਿਉਂ ਸਵਾਲ ਇਹ ਹੈ ਤੂਰ ਜਿਹੜੇ ਪਿੱਛੇ ਕਰਕੇ ਕਰਕੇ ਤੁਸੀਂ ਕਿੱਥੇ ਖੜੇ ਹੋ ਆਪਣੀ ਨਹੀਂ ਗੱਲ ਕਰਦੇ ਪਿਛਲਿਆਂ ਦੀਆਂ ਗੱਲਾਂ ਕਰਕੇ ਉਹ ਚੌੜੇ ਹੋਈ ਜਾਂਦੇ ਸਾਡੇ ਦਾਦੇ ਇਹ ਜੇ ਸੀ ਸਾਡੇ ਬਜ਼ੁਰਗ ਦੀਆਂ ਗੱਲਾਂ ਕਰ ਕਰਕੇ ਠੀਕ ਹੈ ਜੀ ਮਨਮੁਖ ਗੱਲਾਂ ਗੋਈਆਂ ਕੀਤਾ ਚਾਉ ਰਲੀ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪੱਤ ਪਾਟੀ ਸਿਰ ਤੋਂ ਪਹਿਰਾ ਪੜਦੇ ਜਿਹੜੇ ਪਾੜ ਗਏ ਆ ਕਰਕੇ ਰੱਖਤੇ ਮਨਗੇ ਨੰਗੇ ਹੋ ਗਏ ਕਹਤਾ ਜੀ ਸਿੱਖ ਤਾਂ ਹੋ ਜਾਏ ਹੋਈ ਨਹੀਂ ਕੋਈ ਐਵੇਂ ਚੌੜੇ ਹੋ ਫਿਰਦੇ ਹੁਣ ਜੱਡੇ ਹੁਣ ਤਾਂ ਨਾਲੇ ਸਾਰੀ ਦੁਨੀਆ ਵਿੱਚ ਦਰਬਾਰ ਸਾਹਿਬ ਦਾ ਕੀਰਤਨ ਜਾਂਦਾ ਹੁਣ ਚਾਹੀਦੀ ਹੈ ਗੱਲ ਤਾਂ ਠੀਕ ਹੈ ਠੀਕ ਹੈ ਹੁਣ ਕਸਾ ਵੀ ਹੋਣ ਲੱਗ ਗਈ ਮਤਲਬ ਥੋੜਾ ਫਰਕ ਪੈਣਾ ਸ਼ੁਰੂ ਹੋਏਗਾ ਫਰਕ ਥੋੜੇ ਥੋੜੇ ਪਤਾ ਲੱਗ ਗਿਆ ਵੀ ਗੱਲ ਇਹੀ ਠੀਕ ਹੈ ਚੰਗੀ ਗੱਲ ਹੈ ਜੇ ਪਾਸੇ ਇਸ ਨੂੰ ਮੋੜਨਾ ਇਸ ਨਾਲ ਜੱਟਾ ਧਾਰਨਾ ਚਤਣੀ ਰਹਿਣੀ ਹੈ ਹਾਂਜੀ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਸਖਾਈ ਬਾਜ ਗੁਰੂ ਜਗਤ ਬਉਰਾਨਾ ਨਾਮ ਹੈ ਪਾਈ ਹਲ ਅਖੀਰ ਲਈ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਜਿਹੜਾ ਗੁਰਬਾਣੀ ਦਾ ਨਾਮ ਸੱਚਾ ਗੁਰਬਾਣੀ ਦਾ ਸਮਝ ਆ ਜਾਏ ਇਹ ਤਾਂ ਸੁਖ ਦਾਤਾ ਲੋੜ ਇਹ ਨਹੀਂ ਕਿਸੇ ਡਵੈਲਪਮੈਂਟ ਦੀ ਡਵੈਲਪਮੈਂਟ ਤੇ ਉਤਾ ਦੁੱਖ ਮਿਲਦਾ ਹੈ ਇਹ ਮਾਰੀ ਜਾਨਾ ਨੇ ਗੱਲਾਂ ਜਿੰਨੇ ਡਵੈਲਪਮੈਂਟ ਆਉਦੇ ਅੱਗੇ ਦੁੱਖੇ ਦੁੱਖ ਨੇ ਨਾਮ ਸੁਲਾਸੁਖ ਦਾਤਾ ਅੰਤੇ ਹੋਏ ਸਖਾਈ ਅੰਤ ਵੇਲੇ ਬਾਹੇ ਸਨੇ ਫੜਨੀਆ ਉਹ ਸੰਸਾਰ ਜੱਡ ਨੂੰ ਜੀ ਨਹੀਂ ਕਰਦਾ ਇਹ ਸ਼ਰਦਾ ਦਿੰਦਾ ਕਹਿੰਦਾ ਆ ਇੱਥੇ ਸੁੱਖ ਜ਼ਿਆਦਾ ਹੈ ਸੰਸਾਰ ਤਾਂ ਦੁੱਖਾਂ ਨਾਲ ਘਰ ਹੈ ਜਿਉਂਦੇ ਨੂੰ ਲੈ ਜਾਂਦਾ ਉਸ ਵਸਤਾ ਜੋ ਅਸੰਸਾਰ ਛੱਡਣ ਨੂੰ ਤਿਆਰ ਆਂਦਾ ਉਹ ਤਾਂ ਹੁਕਮ ਦੇ ਕਰਕੇ ਛੱਡਦਾ ਨਹੀਂ ਕਹਿੰਦਾ ਨਹੀਂ ਉਹ ਨਾ ਜਦ ਉਹਨੂੰ ਡਿਊਟੀ ਦੇਣੀ ਹੋ ਪੈਂਦੀ ਹੈ ਹੁਕਮ ਦਾ ਵੱਧਾ ਹੈ ਨਾ ਹੁਕਮ ਦਾ ਵੱਧਾ ਜੇ ਨਾ ਜਦ ਉਹਨੇ ਰੱਖਣਾ ਜੇੜੇ ਤੇ ਰੱਖੇ ਜਾਣਾ ਘੱਲ ਹੈ ਹੋਏ ਸਖਾਈ ਬਾਜ ਗੁਰੂ ਗੁਰੂ ਤਾਂ ਬਿਨਾ ਗੁਰੂ ਉਹ ਗਿਆਨ ਹੈ ਅਥਰ ਦੇ ਵਿੱਚ ਜਿਹਦੇ ਨਾਲ ਟੋਟਲ ਧਰਮ ਦਾ ਨਾਮ ਹੋ ਵਿਅਕਤੀ ਕੋਲ ਗੁਰੂ ਜੇ ਇੰਨਾ ਗਿਆਨ ਹੋਵੇ ਤਾਂ ਉਹਨੂੰ ਗੁਰਦੇਵ ਕਹਿ ਸਕਦੇ ਆ ਉਹਨੂੰ ਗੁਰੂ ਨਹੀਂ ਕਹਿ ਸਕਦੇ ਉਹਦੇ ਗਿਆਨ ਨੂੰ ਤਾਂ ਗੁਰੂ ਕਹਿ ਸਕਦੇ ਆ ਪਰ ਅਸਲ ਦੇ ਵਿੱਚ ਗਿਆਨ ਉਹਦੇ ਕੋਲ ਇਹ ਹੁੰਦਾ ਹੀ ਨਹੀਂ ਆਦਮੀ ਦਾ ਜਿਹੜਾ ਗੁਰੂ ਹੈ ਨਾ ਆਦਮੀ ਨੂੰ ਗੁਰੂ ਕਿਉਂ ਨਹੀਂ ਕਹਿੰਦੇ ਆਦਮੀ ਕੋਲ ਗਿਆਨ ਦੇਣ ਵਾਲਾ ਜਿਹੜਾ ਬੋਲਣ ਵਾਲਾ ਗਿਆਨ ਹੈ ਉਹ ਗੁਰੂ ਨਹੀਂ ਹੁੰਦਾ ਬੋਲਣ ਵਾਲਾ ਗਿਆਨ ਸਿਰਫ ਗੁਰਦੇਵ ਹੁੰਦਾ ਮਾਇਆ ਛਡਾ ਸਕਦਾ ਭਰਮ ਦਾ ਨਾਸ ਵੀ ਕਰ ਸਕਦਾ ਪੂਰੇ ਦਾ ਮਾਇਆ ਛਡਾ ਸਕਦਾ ਗਿਆਨ ਸਿਰਫ ਉਹ ਤੋਂ ਗਾਹ ਜਿਹੜਾ ਬਿਨਾਂ ਤਨ ਨਾਲ ਵਾਲੀ ਬਾਣੀ ਹੈ ਧੁਰ ਬਾਣੀ ਉਹ ਗੁਰੂ ਹੈ ਅਸਲ ਵਿੱਚ ਆਦਿ ਨੂੰ ਇਸ ਕਰਕੇ ਗੁਰੂ ਦੀ ਕਹ ਸਰ ਬਾਜ ਗੁਰੂ ਸ਼ਬਦ ਗੁਰੂ ਤੇ ਬਿਨੋ ਸ਼ਬਦ ਗੁਰੂ ਤੇ ਬਿਨਾਂ ਨਾਮ ਤੋਂ ਬਿਨਾਂ ਜਗਤ ਬੋਰਾਣਾ ਜਗਤ ਬੋਰਾਣਾ ਉਪਦੇਸ਼ ਕਰਨ ਵਾਲੇ ਦਾ ਬਖੇਰੇ ਨਹੀਂ ਇੱਥੇ ਤੱਕ ਉਹ ਗੁਰਦੇਵ ਨੇ ਸਾਰੀ ਗੁਰੂ ਤੋਂ ਬਿਨਾਂ ਪਰਮੇਸ਼ਰ ਦੀ ਜਿਹੜੀ ਆ ਤੁਰਕੀ ਬਾਣੀ ਤੋਂ ਬਿਨੋ ਜਗਤ ਬੋਰਾਣਾ ਹੋਇਆ ਫਿਰਦਾ ਹੈ ਤੱਕ ਮੈਂ ਬੜਾ ਤੂੰ ਬੜਾ ਇਹ ਝਗੜਾ ਰਹਿੰਦਾ ਉਥੋਂ ਤੱਕ ਨਾਵਨ ਸਾਰਨਾ پائی ਨਾਮ ਦੀ ਸਾਰੇ ਨਹੀਂ ਹੈ ਆ ਦੇਖੋ ਆ ਜਿਹੜੀ ਹੈ ਨਾ ਨਾਮ ਸਾਰ ਨਾ ਪਾਈ ਚਾਰੇ ਸ਼ਬਦ ਨਹੀਂ ਜਿਹੜੇ ਇਹ ਸੰਕੇਤ ਕਰਦੇ ਨੇ ਨਾਮ ਜਿਹੜਾ ਗੁਰਬਾਣੀ ਦਾ ਉਹ ਨਾਮ ਹੋਰ ਹੈ ਉਹ ਜਿਹੜਾ ਨਾਮ ਹੈ ਜਿਹੜਾ ਬੁਲਾਉਂਦਾ ਮਾਨੂੰ ਉਹ ਨਾਮ ਹੈ ਜਿਹੜਾ ਹੁਕਮ ਹੈ ਬੁਲਾ ਰਿਹਾ ਹੈ ਗੁਰਨਾਣਕ ਬੋਲ ਰਿਹਾ ਨਾਮ ਜਿਹੜਾ ਹੈਗਾ ਬੁਲਾ ਰਿਹਾ ਉਹ ਨਾਮ ਨਹੀਂ ਸਾਰ ਨਹੀਂ ਜਿੱਨਾ ਜਿਹਨੂੰ ਬੁਲਾਵੇ ਨਾ ਜਿਹਨੂੰ ਬੁਲਾਵੇ ਉਸੇ ਅਨੁਸਾਰ ਹੈ ਦੂਜੇ ਨੂੰ ਦੱਸਿਆ ਜਾ ਸਕਦਾ ਹੈ ਦੂਜਾ ਵਿਸ਼ਵਾਸ ਕਰ ਸਕਦਾ ਹੈ ਪਰ ਸਾਰ ਨੂੰ ਉਦੋਂ ਹੀ ਆਪ ਬਿਨਾਂ ਕਰਨਾ ਤੇ ਸੁਣ ਜੂ ਜਦੋਂ ਉਹਦੇ ਹਿਰਦੇ 'ਚ ਪ੍ਰਗਟ ਹੋ ਜੂ ਨਾਮ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ ਸਤਰੂਪ ਸੇਵਾਂ ਸੇਵਾ ਪ੍ਰਵਾਨ ਜਿਹੜੇ ਸਤਰੂਪ ਦੀ ਸੇਵਾ ਕਰਦੇ ਨੇ ਜਿਹੜੇ ਪਹਿਲਾਂ ਗੁਰਬਾਣੀ ਦੇ ਸੱਚ ਨੂੰ ਸਮਝ ਕੇ ਇਹਦੇ ਅਨੁਸਾਰ ਚੱਲਦੇ ਨੇ ਉਹਨਾਂ ਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ ਪ੍ਰਵਾਨ ਕੀ ਹੁੰਦੀ ਹੈ ਸੇਵਾ ਹੀ ਪ੍ਰਵਾਨ ਹੋ ਗਈ ਉਹ ਸੇਵਕ ਵੀ ਪ੍ਰਵਾਨ ਹੋ ਗਿਆ ਸੇਵਕ ਦੀ ਜੇ ਸੇਵਾ ਪ੍ਰਵਾਨ ਹੈ ਤਾਂ ਸੇਵਕ ਪ੍ਰਵਾਨ ਜੇ ਉਹਦੀ ਸੇਵਾ ਪ੍ਰਵਾਨ ਨਹੀਂ ਸੇਵਕ ਵੀ ਪ੍ਰਵਾਨ ਨਹੀਂ ਸੇਵਾ ਪ੍ਰਵਾਨ ਨੂੰ ਜੋਤੀ ਜੋਤ ਮਲਾਈ ਜਿਹੜਾ ਇੱਕ ਹੋ ਗਿਆ ਦੇਖੋ ਜੋਤੀ ਜੋਤ ਮਲਾਉਣ ਤਾਂ ਛੱਡੀ ਗੱਲ ਜਿਹੜੀ ਹੈ ਉਹਦੀ ਤਾਂ ਮਲਦੀ ਹੈ ਜੇ ਸੇਵਕ ਪ੍ਰਵਾਨ ਹੋ ਜਵੇ ਜਿਹੜੇ ਸਤਗੁਰ ਦੀ ਸੇਵਾ ਕਰਦੇ ਨੇ ਗੁਰਬਾਣੀ ਆਪਣੇ ਵਾਸਤੇ ਸਤਗੁਰੇ ਆ ਸੱਚ ਦਾ ਗਿਆਨ ਦੇ ਰਹੀ ਹੈ ਇਹ ਸਤਗੁਰ ਦੀ ਜਿਹੜੀ ਗੱਲ ਹੈ ਜੇ ਸਤਗੁਰ ਆਪ ਹੁੰਦੇ ਤਾਂ ਵੀ ਇਹੀ ਗੱਲ ਕਹਿਣੀ ਸੀ ਗੁਰੂ ਨਾਨਕ ਹੁੰਦੇ ਆਪ ਤਾਂ ਵੀ ਇਹੀ ਗੱਲ ਕਹਿਣੀ ਸੀ ਹੁਣ ਲਿਖੀ ਹੋਈ ਕਹਿੰਦੀ ਉਹਨਾਂ ਨੇ ਸਤਗੁਰ ਸੇਵਾ ਹੈ ਦੇ ਬਾਣੇ ਜਿਹੜੇ ਚੱਲਦੇ ਨੇ ਸਤਗੁਰ ਅਨੁਸਾਰ ਜਿਹੜੇ ਉਹਦੀ ਗੱਲ ਮੰਨ ਕੇ ਚੱਲਦੇ ਨੇ ਉਹ ਪ੍ਰਵਾਨ ਹੋ ਜਾਂਦੇ ਨੇ ਦਰਗਾਹ ਜਦ ਜੋਤੀ ਜੋਤ ਮਿਲਾਈ ਜਿਨ੍ਹਾਂ ਨੇ ਇੱਕ ਵਾਰੀ ਚਿੱਤ ਹੋ ਕੇ ਰਹਿੰਦੇ ਨੇ ਆ ਆਪਣਾ ਚਿੱਤ ਮਨ ਇੱਕ ਕਰ ਲਿਆ ਜੀ ਤੁਹਾਨੂੰ ਮਨ ਨੂੰ ਆਪਣੇ ਵੀ ਜਿੱਤ ਲਿਆ ਜੀ ਤੁਹਾਨੂੰ ਮਨ ਨੂੰ ਚਿੱਤ ਦੇ ਅਕਲ ਦੇ ਅਧੀਨ ਕਰਕੇ ਚੱਲਦੇ ਨੇ ਜਿਹੜੇ ਗੁਰੂ ਬਾਣੀ ਗੁਰਬਾਣੀ ਨੂੰ ਸਮਝ ਕੇ ਉਹਦੇ ਅਧੀਨ ਜੀ ਮਨ ਨੂੰ ਆਪਣੇ ਚਲਾਉਂਦੇ ਨੇ ਚੱਲ ਨੇ ਉਹਨਾਂ ਦੀ ਜੋਤੀ ਜੋਤ ਮਿਲ ਜਾਂਦੀ ਹੈ ਇੱਕ ਜੋਤ ਹੋ ਜਾਂਦੇ ਨੇ ਉਹ ਜੋਤੀ ਜੋਤ ਮਿਲਾਇਦੋ ਕੀ ਭਾਵ ਮਨ ਜਿਹੜਾ ਹੈਗਾ ਉਹ ਚਿੱਤ ਵਿੱਚ ਸਮਾ ਜਾਂਦਾ ਹੈ ਮਨ ਤੋਂ ਜੋਤ ਸਰੂਪ ਜੋਤੀ ਸਰੂਪ ਨਹੀਂ ਗਿਆ ਭਰਦੂ ਜੋਤੀ ਬਹੁਵਚਨਾਂ ਜੋਤੀ ਇਕਵਚਨ ਨਹੀਂ ਹੈ ਜੋਤੀ ਬਹੁਵਚਨ ਜੋਤ ਇਕਵਚਨ ਪਿਆਰੀ ਲੱਗੀ ਹੋਈ ਹੈ ਅੰਨ ਜਿਹੜਾ ਹੈਗਾ ਜਾਂ ਜੋਤੀ ਮਿਲ ਜਾਂਦਾ ਤਾਂ ਸਾਰੇ ਸੱਚਖੰਡ ਜੇ ਮਿਲ ਜਾਂਦਾ ਨੇ ਫਿਰ ਜਾਂ ਦੇ ਕੋਨਾ ਇਕ ਸਾਰੇ ਇਕੋ ਨੇ ਫਿਰ ਇਸ ਸਮੁੰਦਰ ਜੇ ਜਾ ਮਿਲਦਾ ਉਹ ਜਾਂ دریا ਜੇ ਮਿਲ ਗਿਆ ਜਾਂ ਸਮੁੰਦਰ ਜੇ ਮਿਲ ਗਿਆ ਤਾਂ ਲਿਕੋ ਹੀ ਹੋ ਜਾਂਦੀ ਹੈ ਸਮੁੰਦਰ دریا ਨਾਲ دریا ਸਮੁੰਦਰ ਨਾਲੇ ਜੁੜਿਆ ਹੁੰਦਾ ਹੈ ਤੋ ਸਹਾਈ ਸੋ ਸੇਵਕ ਤੇ ਹਾ ਜਿਹੋ ਜਾਂ ਸਹੇਬ ਖੁੰਦਾ ਸੇਵਕ ਹੋਇ ਹੈ ਹੋ ਜਾਂਦਾ ਹਰ ਐਸਾ ਚਾਹੀਏ ਜੈਸਾ ਹਰੀ ਹੋਏ ਸੇਵਕ ਹਰ ਰੂਪ ਹੋ ਜਾਂਦਾ ਹਰ ਕਾ ਸਹੇਬ ਨਾ ਤੇ ਜਿਸ ਬਾਣਾ ਮੰ ਬਸਾਈ ਜਿਹਨੇ ਬਾਣਾ ਹਰ ਦਾ ਬੁੱਲ ਤੇ ਬਸਾ ਲਿਆ ਜਿਹਦੇ ਬਾਣਾ ਬੁੱਲ ਦੇ ਵਿੱਚ ਬਸ ਗਿਆ ਉਹ ਸਹੇਬ ਵਰਗਾ ਹੀ ਹੋ ਜਾਂਦਾ ਸਹੇਬ ਦਾ ਰੂਪ ਹੋ ਜਾਂਦਾ ਸਿਰਫ ਬਾਣਾ ਮੰਨ ਜਿਹੜਾ ਹੈਗਾ ਪਾਣੇ ਨੂੰ सेंट परसेंट 100% ਬਿਜ਼ਨਸ ਦੇ ਗੁਰਖਾ ਮਾਨ ਮੰਨ ਲੈਣਾ ਸਾਡਾ ਟਾਰਗੇਟ ਹੋਣਾ ਚਾਹੀਦਾ ਫਸ ਇਹੀ ਟਾਰਗੇਟ ਅਚਕਾ ਸਾਰਾ ਹੀ ਕੰਮ ਸੌਰ ਜਾਂਦਾ ਉਹਦੇ ਤਿੰਨੇ ਲੋਕ ਸਿਰ ਜਾਂਦੇ ਨੇ ਜਿਹੜੇ ਪਾਣੂ ਬੰਦ ਲਵੇ ਆਪਣੇ ਪਾਣੇ ਕੋਹ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਵੇਖਿਆ ਹੁਣ ਤੁਸੀਂ ਅੰਦਰ ਝਾਕ ਕੇ ਕਹਿੰਦੇ ਦੇਖ ਲੋ ਜਿਹੜੇ ਲੋਕ ਆਪਣੇ ਬਾਣੀ ਚੱਲੇਦੇ ਆ ਚੱਲ ਰਹੇ ਨੇ ਉਹਨਾਂ ਜੋ ਕਿਹੜਾ ਇੱਕ ਆਦਮੀ ਦੱਸੋ ਜਿਹਨੇ ਸੁੱਖ ਪਾਇਆ ਹੋਵੇ ਆਪਣੇ ਬਾਣੇ ਕਹੋ ਕਿਨ ਸੁੱਖ ਪਾਇਆ ਦੱਸੋ ਕਿਨੇ ਸੁੱਖ ਪਾਇਆ ਆਪਣੇ ਬਾਣੀ ਚੱਲ ਇੱਕ ਦਾ ਨੌ ਦਾ ਗੜਾਓ ਇੱਥੇ ਤਾਂ ਹਜ਼ਾਰਾਂ ਨੌ ਗਣੇ ਪਏ ਨੇ ਅੰਦਾ ਅੰਧ ਕਮਾਈ ਅੰਦਾ ਹੈ ਗਿਆਨੀ ਆਹਨ ਦੀ ਕਮਾਈ ਕਰ ਰਹੇ ਬੜੇ ਬੜੇ ਕਿੰਨੇ ਕਿੰਨੇ ਆਸ਼ਰਮ ਬਣਾ ਬੈਠੇ ਨੇ ਡੇਰੇ ਬਣਾ ਬੈਠੇ ਨੇ ਕਾਹ ਤੋਂ ਕਾਹ ਨੂੰ ਵਧਾਈ ਜਾਂਦੇ ਨੇ ਕਿਸੇ ਨੂੰ ਸੁੱਖ ਮਿਲਿਆ ਅੰਨੇ ਨੇ ਅੰਨ ਖਵਾਈ ਅੰਦੇ ਕਮਾਈ ਕਰ ਰਹੇ ਨੇ ਅੰਦੇ ਅੰਦਾ ਅੰਧੇ ਕਮਾਈ ਅੰਨਾ ਅੰਦੀ ਕਮਾਈ ਕਰ ਰਹੇ ਸਾਇਆ ਦੀ ਕਮਾਈ ਅੰਧ ਕਮਾਈ ਹੈ ਜਿਆਦਾ ਆਸ਼ਰਮ ਬਣਾਉਣੇ ਜਿਆਦਾ ਡੇਰੇ ਬਣਾਉਣੇ ਵੱਡੇ ਡੇਰੇ ਬਣਾਉਣੇ ਸਭ ਅੰਧ ਕਮਾਈ ਹੈ ਇਹ ਸਾਰੇ ਸੰਤ ਆ ਗਏ ਇਸ ਦੇ ਵਿੱਚ ਬਚਿਆ ਕੋਈ ਬਦੀ ਚਰਮਣੀ ਕਮੇਟੀ ਵਾਲੇ ਬੰਦੀ ਬਚੇ ਉਹ ਵੀ ਵਿਕੇ ਆ ਗਏ ਅੰਧ ਕਮਾਈ ਵਾਲੇ ਹੀ ਨੇ ਵਿਖਿਆ ਕਦੇ ਹੀ ਰਜੇ ਨਹੀਂ ਮੂਰਖ ਭੁੱਖ ਨਾ ਜਾਈ ਵਿਖਿਆ ਕਦੇ ਹੀ ਰਜੇ ਨਹੀਂ ਉਹ ਮਾਇਆ ਨਾਲ ਵੀ ਕਿਸੇ ਨੂੰ ਰਾਜ ਆਇਆ ਕਦੇ ਆਇਆ ਨਾ ਕਦੇ ਕੋਈ ਰਜੇ ਮੂਰਖ ਤੋਖ ਨਾ ਜਾਈ ਜਿਹਾਂ ਦੀ ਭੁੱਖ ਨਹੀਂ ਜਾਂਦੀ ਉਹ ਮੂਰਖ ਨੇ ਉਹਨੂੰ ਮੂਰਖਾਂ ਨੂੰ ਪੁੱਛੇ ਭੁੱਖ ਕਰੇ ਕਿਸੇ ਦੀ ਗਈ ਨਹੀਂ ਪਹਿਲੀ ਪੰਕਤੀ ਹੈ ਭੁੱਖਿਆ ਭੁੱਖ ਨਾ ਉਤਰੇ ਜੇ ਬਨਾਂਪੁਰੀਆਂ ਘਾਰ ਉਹ ਸ਼ੁਰੂ ਜਿਵੇਂ ਜਬਜੀ ਸਾਹਿਬ ਪੜ ਲੈਂਦੇ ਉੱਥੇ ਹੀ ਆ ਭੁੱਖਿਆ ਭੁੱਖਣਾ ਉਤਰਿਆ ਜਬਨਾਪੁਰੀਆਂ ਘਰ ਜੇ ਫੇਰ ਵੀ ਭੁੱਖ ਰੱਖਦਾ ਹੈ ਮੂਰਖ ਹੈ ਉਹ ਜੇ ਫੇਰ ਵੀ ਸਮਝਦਾ ਭੁੱਖ ਉਤਰ ਜੂ ਫੇਰ ਵੱਡਾ ਮੂਰਖ ਹੈ ਉਹ ਇਹ ਨਹੀਂ ਜਾਣ ਵਾਲੀ ਚੀਜ਼ ਭੁੱਖ ਜਾਣ ਵਾਲੀ ਚੀਜ਼ ਨਹੀਂ ਲੋੜ ਪੂਰੀ ਹੋਣ ਵਾਲੀ ਚੀਜ਼ ਹੈ ਭੁੱਖ ਪੂਰੀ ਹੋਣ ਵਾਲੀ ਚੀਜ਼ ਹੈ ਨਹੀਂ ਲੋੜ ਔਰ ਭੁੱਖ ਦੇ ਵਿੱਚ ਡਿਫਰੈਂਸ ਸਮਝਣ ਕੇ ਚੱਲਣਾ ਚਾਹੀਦਾ ਗੁਰਮੁਖ ਲੋੜ ਔਰ ਭੁੱਖ ਨੂੰ ਵੱਖਰੀ ਵੱਖਰੀ ਰੱਖਦਾ ਲੋੜ ਤੋਂ ਪਹਿਲਾਂ ਨਹੀਂ ਗੁਰਮੁਖ ਭੁੱਖ ਪਹਿਲਾਂ ਹੋਂ ਦਿੰਦਾ ਹੈ ਭੁੱਖ ਪੈਦਾ ਹੁਣ ਦੇਣੀ ਨੀ ਲੋੜ ਤੋਂ ਬਚਣ ਜੋ ਲੋੜ ਤੋਂ ਭੱਜ ਗਏ ਲੋੜ ਤੋਂ ਭੱਜਣਾ ਵੀ ਮੂਰਖਤਾ ਹੈ ਭੁੱਖ ਪੈਦਾ ਕਰੀ ਵੀ ਮੂਰਖਤਾ ਹੈ ਵਿਚਾਰ ਦੋ ਹਾਂਜੀ ਦੂਜੇ ਸਭ ਕੋ ਲੱਗ ਬਿਗੁੱਤਾ ਬਿਨ ਸਤਗੁਰੂ ਬੂਝ ਨਾ ਪਾਈ ਸਤਗੁਰ ਸੇਵੈ ਸੋ ਸੁਖ ਪਾਏ ਜਿਸ ਨੂੰ ਕਿਰਪਾ ਕਰੇ ਰਜ਼ਾਈ ਜਿਹੜਾ ਦੂਜੇ ਪਾਸੇ ਲੱਗਿਆ ਹੋਇਆ ਭੁੱਖ ਆਲੇ ਭੁੱਖ ਪੂਰੀ ਕਰਨ ਪਾਸੇ ਲੱਗਿਆ ਹੋਇਆ ਦੂਜੇ ਪਾਸੇ ਲੱਗਿਆ ਹੋਇਆ ਜਿਹੜਾ ਮਾਇਆ ਨਾਲ ਭੁੱਖ ਪੂਰੀ ਕਰਨ ਲੱਗਿਆ ਹੋਇਆ ਨਾ ਉਹ ਦੂਜੇ ਪਾਸੇ ਲੱਗਿਆ ਦੂਜੇ ਸਭ ਕੋ ਲੰਗ ਬਗੂਟਾ ਕਿਸੇ ਕਰਕੇ ਤਾਂ ਮੁਕਤੀ ਨਹੀਂ ਮਿਲੀ ਕਿਸੇ ਕਰਕੇ ਤਾਂ ਧਰਮ ਦੇ ਵਿੱਚੋਂ ਕੁਝ ਪ੍ਰਾਪਤੀ ਵੀ ਨਹੀਂ ਬਗੂਟਾ ਉਹ ਅਸਲ ਨਾਮ ਤਾਂ ਮਿਲਿਆ ਹੀ ਨਹੀਂ ਕਿਸੇ ਨੂੰ ਬਿਨ ਸਤਗੁਰੂ ਦੇ ਨਾ ਪਾਈ ਸਤਗੁਰੂ ਤੇ ਬਿਨਾਂ ਕੋਈ ਸਤਗੁਰੂ ਮਿਲਿਆ ਨਹੀਂ ਸੱਚ ਦਾ ਉਪਦੇਸ਼ ਕਿੱਥੇ ਮਿਲਿਆ ਦੀ ਤਾਂ ਮੁਝ ਦੀ ਸਕੇ ਹੁਣ ਸਮਝ ਲਈ ਸਕੇ ਗੱਲ ਨੂੰ ਜਿਹੜੇ ਗੱਲ ਜਿਹਨਾਂ ਕੋ ਸੱਚ ਦਾ ਉਪਦੇਸ਼ ਹੈ ਨਹੀਂ ਉਹ ਸੰਤ ਨਹੀਂ ਹੈ ਜਿਹੜੇ ਐਸਾ ਉਪਦੇਸ਼ ਨਹੀਂ ਕਰਦੇ ਜੋ ਗੁਰਬਾਣੀ ਕਰ ਰਹੀ ਹੈ ਜੋ ਅਸੀਂ ਪੜ ਰਹੇ ਹਾਂ ਸਮਝ ਰਹੇ ਹਾਂ ਉਹ ਸਾਰੇ ਮੂਰਖ ਨੇ ਸੰਤ ਨਹੀਂ ਹਨ ਮੂਰਖ ਨੇ ਠੱਗ ਨੇ ਉਹ ਸੋ ਜੀ ਸਤਗੁਰ ਜਿਸ ਨੂੰ ਕਿਰਪਾ ਕਰੇ ਰਜ਼ਾਈ ਜੇ ਠੱਗ ਹੋਵੇ ਕੋਈ ਉਦੇ ਪਾਣੀ ਚੱਲੇ ਉਹਦੇ ਕਹਿਣ ਅਨਸਾਰ ਚੱਲੇ ਸਤਿਗੁਰੂ ਸੇਵੇ ਗੁਰਬਾਣੀ ਸਾਡੀ ਹੁਣ ਸਤਿਗੁਰ ਦੀ ਆਵਾਜ਼ ਆਏ ਸਤਿਗੁਰ ਦੀ ਗੱਲ ਆ ਸਤਿਗੁਰ ਸੇਵੇ ਸੁਖ ਪਾਏ ਸੁਖ ਆਖੇ ਤੇ ਚੱਲੂਗਾ ਸਤਿਗੁਰ ਦੇ ਪਾਣੀ ਚੱਲੂਗਾ ਕਿਰਪਾ ਕਰੇ ਰਜ਼ਾਈ ਉਹਦੇ ਤੇ ਹੀ ਰਜ਼ਾਈ ਕਿਰਪਾ ਕਰਦਾ ਉਹਦੇ ਤੇ ਪਰਮੇਸ਼ਰ ਦੀ ਕਿਰਪਾਈ ਹੁੰਦੀ ਹੈ ਕਿਰਪਾ ਹੋਈ ਤੇ ਬੰਦ ਨਹੀਂ ਕਰ ਸਕਦਾ ਪਰ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਕੁਝ ਆਪਣੀ ਉਹਦੀ ਇੱਛਾ ਹੁੰਦੀ ਹੈ ਦੋਏ ਲੜਕੇ ਤਾ ਖਲਬੰਦੀ ਪਰ ਮੈਸੇ ਦੀ ਦਾ ਖਰਪਾ ਖੈ ਸਾਰਿਆਂ ਤੇ ਹੀ ਹੈ ਜਿਆਦਾ ਉਦਦੇ ਹੋ ਜਾਂਦੀ ਹੈ ਜਿਹੜਾ ਉਤੇ ਕਿਰਪਾ ਬੰਦਾ ਰਹਿੰਦਾ ਰੋਜ ਵੀ ਮੇਰੇ ਤੇ ਕਿਰਪਾ ਕਰੋ ਹਾਂਜੀ ਇੱਥੇ ਸੁਖ ਪਾਏ ਤੋਂ ਭਾਵ ਸੁਖ ਸਾਗਰ ਵਿੱਚ ਨਿਵਾਸ ਪਾ ਲੇਗਾ ਹੈ ਜੀ ਜੈ ਸੁਖਪ੍ਰਾਪ ਹੋ ਗਿਆ ਸਾਗਰ ਜੇ ਭਰਾ ਪੜ ਗਿਆ ਜਾ ਕੇ ਠੀਕ ਹੈ ਜੀ ਸੋ ਸੁਖ ਪਾਏ ਹੈ ਨਾ ਸੁਖ ਪਰੋਂਕਰ ਲੱਗਿਆ ਭਾਵ ਸੁਖ ਸਾਗਰ ਦੀ ਗੱਲ ਹੋ ਰਹੀ ਹੈ ਤੇ ਕੋਈ ਸੁਖ ਸਾਰੀ ਸੁਖ ਤਾਂ ਬਹੁਤ ਹੈ ਬਹੁਤ ਹੁੰਦਾ ਹੈ ਸੰਖਾ ਦੀ ਕਿਤਾਬ ਹੋ ਹੈ। ਅੱਛਾ ਜੀ। ਇੱਥੇ ਪਿੱਛੇ ਤੇ ਅੱਖਰ ਸੇ ਹੈ। ਸੇ ਹੁੰਦਾ ਬਹੁਵਚਨ। ਆ ਸਾਰੇ ਪਰਵਾਨ ਨੇ ਹੋ। ਅੱਛਾ ਨਹੀਂ ਪਰ ਇਹ ਲਿਖਣ ਚ ਵੀ ਇਸ ਤਰ੍ਹਾਂ ਹੀ ਆਉਂਦਾ ਹੈ ਜੇ ਆਪਾਂ ਪਰਵਾਨ ਅੱਖਰ ਦੇਖੀਏ ਜਿਹੜਾ ਪ ਪਾ ਰਾਰਾ ਵਾਵੇਂ ਤੇ ਨਾਣਾ ਹੈਗਾ ਇਹ ਸਿਰਫ ਦੋ ਬਾਰ ਆਉਂਦਾ ਬਿਨਾਂ ਔਂਕਰ ਤੋਂ ਇਹ ਲੱਗਦਾ ਹੈ ਛਾਪੇ ਦੀ ਗਲਤੀ ਕਰਕੇ ਆ ਰਿਹਾ ਉਹ ਵੀ ਇੱਕ ਜਪਜੀ ਸਾਹਿਬ ਚ ਆ ਜਾਂਦਾ ਹੋ ਸਕਦਾ ਛਾਪੇ ਦੀ ਗਲਤੀ ਕਰਕੇ ਆਇਆ ਤੇ ਹਾਂ ਪਰਵਾਨ ਦੂਸਰੀ ਜਗ੍ਹਾ ਹੁੰਦਾ ਹੈਗਾ ਜੋ ਤਿਸ ਭਾਵੈ ਸੋ ਪਰਵਾਨ ਇਹ ਮਲਾਰ ਮਹੱਲਾ ਪਹਿਲਾ ਚ ਆਉਂਦਾ ਇਹ ਵੀ ਗਲਤੀ ਹੈ ਕਿਉਂਕਿ ਸੂ ਦੇ ਨਾਲ ਤਾਂ ਹਮੇਸ਼ਾ ਹੀ ਓਂਕਰ ਲੱਗਣਾ ਚਾਹੀਦਾ ਹੈ ਜੀ ਸੇ ਨਾਲ ਨਹੀਂ ਲੱਗਣਾ ਚਾਹੀਦਾ ਪਰ ਇੱਥੇ ਗਲਤੀ ਲੱਗਦੀ ਹੈ ਕਿ ਜੋ ਤੁਸੀਂ ਭਾਵੇਂ ਸੂ ਬਿਲਕੁਲ ਠੀਕ ਹੈ ਪਰ ਜਿਹੜਾ ਪਰਵਾਨ ਅਖ ਓਂਕਰ ਨਾਲ ਹੈ 126 ਬਰ ਆਉਂਦਾ ਪ੍ਰਿੰਟ ਹੋਇਆ ਇਹਦਾ ਮਤਲਬ ਪਰਵਾਨ ਅੱਖਰ ਦਾ ਮੂਲ ਰੂਪ ਓਂਕਰ ਨਾਲ ਹੀ ਹੈ ਬੋਧਨ ਪਰਵਾਨ ਨਹੀਂ ਹੋ ਸਕਦਾ ਮੋਬਜਨ ਪ੍ਰਵਾਨ ਮਾਇਆਜ ਹੋ ਧੱਕਦਾ ਅਡਡ ਦੇ ਬੰਡਾ ਨੇ ਅਡਡ ਸੀਜਾ ਅਡਡ ਪ੍ਰਮਾਨ ਪੱਤਰ ਦੇ ਉੱਥੇ ਦਾ ਇੱਕੋ ਹੀ ਪ੍ਰਮਾਨ ਪੱਤਰ ਹੈ ਸਾਰਿਆਂ ਦਾ ਸਾਰ ਇੱਕੋ ਹੀ ਗੱਲ ਹੈ ਠੀਕ ਹੈ ਜੀ ਇੱਥੇ 20ਵੀਂ ਪੌੜੀ ਦੀ ਸਮਾਪਤੀ ਹੈ ਜੀ